ਉਹ ਗੁਵੈ ਸੂਰ ਅਸੂਰ ਸੰਗਾ ਰਹਿ ਉੱਚੋ ਦੇਖ ਸ਼ਬਦ ਵਿਚਾਰ ਹੈ ਉਹ ਵਾ ਸੂਰ ਦੀ ਸੂਰ ਹੀ ਚੜਦਾ ਹੈ ਅਸੂਰ ਤੇੜ ਅਸੂਰ ਹਾਂਜੀ ਜਿਹੜੀ ਸੁਰਾ ਦੇ ਜਿਹੜੇ ਫੁੱਲ ਨੇ ਫੁੱਲ ਦੇ ਕੋਲ ਬੁੱਤੇ ਹਾਂਜੀ ਉਹ ਸਾਰੇ ਹੀ ਖਦਮ ਬੁੱਤ ਸਾਰੇ ਜੁੱਤੇ ਅੱਛਾ ਉਹਨਾਂ ਦੀ ਬੋਲਤੀ ਉਹ ਬੰਦ ਹੋ ਜਾਂਦੀ ਹੈ ਹੂੰ ਹੂੰ ਉਹ ਫੋਲਦੇ ਫੜਾਈ ਦੀ ਹੁੰਦੇ ਅੱਛਾ ਉਹ ਅਸੋਰ ਦੇ ਫੋਲਦੇ ਅਸੋਰ ਉਹ ਟਕਰਾਉਣ ਵਾਲੇ ਫੋਲਦੇ ਅੱਛਾ ਕੋਲ ਬੁੱਤ ਜਿਹੜੀ ਫੋਲਦੇ ਸੋੜਾ ਹੈ ਸਾਰੇ ਜੋ ਦਿਲ ਅਸੋਲ ਸੰਘਾਰ ਹੈ ਉੱਚੋ ਦੇਖ ਸ਼ਬਦ ਵਿਚਾਰ ਹੈ ਉੱਚੋ ਦੇਖ বাস ਬੇਜੇ ਇਹ ਜੀ ਨਾ ਵਸਾਉਂ ਜੀ ਹੋ ਜਾਂਦੀ ਇਹ ਵੀ ਵਸਾ ਧੀਰੇ ਨੀ ਜੁੜਿਆ ਹੋਇਆ ਰਾਸ਼ ਨਾਲ ਜੁੜਿਆ ਹੋਇਆ ਹੈ ਸ਼ਬਦ ਬਿਚਾਰ ਕਰਦਾ ਤੇ शब्द विचार ਵਿਚਾਰ ਆਪਾਂ ਹੁਣ ਕਰਦੇ ਆ ਇਹਦੇ ਨਾਲੋਂ ਫਿਰ ਉਹ ਕਿਤੇ ਉੱਤਮ ਸ਼ਬਦ ਵਿਚਾਰ ਆ ਜੀ ਆ अंत ਬਹਿ ਜਾਵੇ ਕੀਤੀ ਆ ਫੇ ਬਾਣੀ ਲੱਗੀ ਹੈ ਉਹ ਅੱਪੇ ਆਦਤ ਤੇ ਲੋਏ ਹੂੰ ਅੱਪੇ ਹੈ ਤਨੇ ਲੋਕਾਂ ਵਿੱਚ ਜੀਵ ਅਛਾ ਜੀ ਆ ਤੋਂ ਲੈ ਕੇ ਅੰਤ ਤੱਕ ਹੈਗੇ ਆਪੇ ਜੀਵੇ ਨੇ ਉੱਪਰ ਤੇ ਹੈ ਜੀ ਉੱਪਰ ਆਇਆ ਅਛਾ ਉਸ ਤੱਕ ਆਇਆ ਗੱਲ ਭਾਇਆ ਹਾਂ ਇਹਨਾਂ ਲੋਕਾਂ ਦੇ ਹੀ ਠੀਕ ਹੈ ਜੀ ਇਹ ਲੋਏ ਆਪੇ ਕਰ ਕਥਾ ਸੁਣੇ ਸੁਈ ਆਪੇ ਕਰਦਾ ਆਪੇ ਕਰਦਾ ਠੀਕ ਹੈ ਜੀ ਸਤਨ ਵਾਲੇ ਵੀ ਗੁਰਬੁਖਦੇ ਸੁਣਨ ਵਾਲੇ ਵੀ ਗੁਰਬੁਖਦੇ ਠੀਕ ਹੈ ਜੀ ਕਿਤੇ ਬੁੱਲ ਬੁਖਵੀਰੇ ਦਰਸਨ ਵੀਰੇ ਹਾਂਜੀ ਉਹ ਵਿ data ਮਨ ਤਨ ਦੇ ਉਹ ਵਿ data ਮਨ ਮੁਖ ਸੋਈ ਮਨੀ ਮੁਖੀ ਸੋਈ ਉਹ ਵਿ data ਉਹ ਪੈਦਾਤਾ ਬੁੱਲ ਤਨ ਦੇਣ ਵਾਲਾ ਹੈ ਅੱਛਾ ਜੀ ਬਣ ਸਰੀਰ ਦੋਏ ਦੇਣ ਵਾਲਾ ਦਾਤਾ ਹੋ ਕਬਲੀ ਜਿਹੜਾ ਉਹ ਹੀ ਦਿਨ ਹੋਣਾ ਠੀਕ ਹੈ ਜੀ ਉਹ ਜੋ ਡਾਊਨ ਹੋਣਾ ਹੈ ਹਾਂ ਜੀ ਉਹ ਬੋਲ ਵਿੱਚ ਵੀ ਉਹ ਬੋਲ ਵਿੱਚ ਵੀ ਉਹ ਮੁਖ ਵਿੱਚ ਵੀ ਹੋਣਾ ਅੱਛਾ ਜੀ ਮੁਖ ਤੋਂ ਮੱਲੇ ਬੁੱਧੀ ਹੈ ਜੀ ਹਾਂ ਇਹ ਵੀ ਹੋਈ ਹੈ ਬੋਲ ਵਿੱਚ ਵੀ ਹੋਈ ਹੈ ਠੀਕ ਹੈ ਤੇ ਜਦ ਮੁਖ ਹੀ ਲਿਖਿਆ ਮੁਖ ਬੁੱਧੀ ਚ ਪਿੱਛੇ ਗੱਲ ਹੈ ਜੀ ਕਿ ਕਈ ਗੱਲ ਨਾ ਬਹਲ ਵਿੱਚ ਵੀ ਹੈ ਦੁੱਖ ਵਿੱਚ ਵੀ ਹੈ ਠੀਕ ਹੈ ਪਰਬ ਜਗ ਜੀਵਨ ਅਵਰ ਨਾ ਕੋਏ ਨਾਨਕ ਨਾਮ ਰਤੇ ਪਤ ਹੋਈ ਪਰਬ ਜਗ ਜੀਵਨ ਵਰ ਨਾ ਕੋਈ ਜਗ ਜੀਵਨ ਪ੍ਰਭਾ ਹੋਰ ਕੋਈ ਨਹੀਂ ਉਹ ਅੱਛਾ ਜੀ ਇਹ ਲੇਕ ਨੰਨਾ ਵੀ ਜਿਹੜਾ ਉਹਦੇ ਨਾਲ ਉਹਦਾ ਰੰਗ ਚੱਲ ਗਿਆ ਜੀ ਨੂੰ ਅੱਛਾ ਜੀ ਉਹਦੀ ਪਾਤ ਹੋ ਜਾਂਦੀ ਉਹ ਪਾਤਾਂ ਦੀ ਕਰ ਲੈ ਜਾਂਦੇ ਉਹਦੇ ਵਾਸਤਾ ਬਦਲਣਾਂ ਦੀ ਉਹਦਾ ਛੁਟਕਾਰਾ ਹੋ ਜਾਂਦਾ ਠੀਕ ਹੈ ਪ੍ਰਾਪਤੀ ਹੋ ਜਾਂਦੀ